ਸਤਿ ਲੋਕ ਮਹੱਲਾ ਪਹਿਲਾ ਕੁੱਲ ਨਾ ਦਿੰਦੇ ਬਾਬਲੇ ਲੈਂਦੇ ਵੱਡੇ ਨਿਲੱਜ ਮਾਵਈ ਟਿੱਕਲ ਬੰਨਣਾ ਛੱਜ ਮੁਸਲਮਾਨੀ ਰਾਸ ਸੀ ਨਾ ਉਹਦੇ ਚ ਕੁੱਲਾ ਜਿਹੜਾ ਹੁੰਦਾ ਸੀ ਨਾ ਪੁੱਲ ਤੇ ਰੱਖਦੇ ਇੱਕ ਅਕਸਰੀ ਦੀ ਨਿਸ਼ਾਨੀ ਸੀ ਜਿਵੇਂ ਕੋਈ ਇੱਜ਼ਤ ਦੀ ਨਿਸ਼ਾਨੀ ਜਿਵੇਂ ਸਾਡੇ ਸਰੂਪੇ ਦੇ ਦਿੰਦੇ ਨੇ ਹੁਣ ਅਨੰਦ ਸਿੰਘਰ ਫਰਵਾਰ ਜੰਦੇ ਨੇ ਜਰ ਫਰਲੇ ਦੀ ਤਾਂ ਕੁਝ ਹੋਰ ਸੀ ਮਨਿਆ ਦਾ ਉਹ ਨਿਸ਼ਾਨ ਸਾਹਿਬ ਕਰਕੇ ਸੀ ਨਿਸ਼ਾਨ ਸਾਹਿਬ ਜੰਗ ਵਡਿਆਈ ਦੀ ਹੈ ਸੰਸਾਰੀ ਵਡਿਆਈ ਦਾ ਪ੍ਰਤੀਕ ਹੈ ਕੁੱਲਾ ਸੰਸਾਰੀ ਵਡਿਆਈਆਂ ਜਿਹੜੇ ਦਿੰਦੇ ਨੇ ਉਹ ਤਾਂ ਕਹੜੇ ਨੇ ਬਾਬਲੇ ਨੇ ਫਿਰ ਕਾਹਾਂ ਜਾਂਦੀਆਂ ਨੇ ਸੰਮਾਨਤ ਕਰਦੀਆਂ ਨੇ ਜਿਹੜੀਆਂ ਉਰਾਨੀ ਸਰਕਾਰਾਂ ਕਰਦੀਆਂ ਸੀ ਆਪਣੇ ਹੱਥ ਕਾਰਜ ਵੀ ਨੂੰ ਕਰਨ ਵਾਸਤੇ ਚਲੋ ਜੀ ਲੋਕਾਂ ਨੂੰ ਵੀ ਕਰਨ ਵਾਸਤੇ ਕੋਈ ਅਸਾਚਨ ਨੂੰ ਦੇਤਾ ਕਹਿੰਦਾ ਜੀ ਆਹ ਦੇ ਦੋ ਫਲੰਦ ਤੋਂ ਸਰਦੋਸ ਕਰ ਦੋ ਇੱਦਾਂ ਕਰਦੇ ਹੀ ਰਹਿੰਦੇ ਨੇ ਗੁਰਬਾਣੀ ਦੀ ਆ ਕਿ ਕਰਤੇ ਹੱਥ ਵੜਿਆਈਆਂ ਜੇ ਭਾਵੇਂ ਦਿੰਦੇ ਵੜਿਆਈ ਤੋਂ ਉਹਦੇ ਹੱਥੀਂ ਤੇ ਕਰਤੇ ਪੁਰਖ ਦੇ ਉਹਨਾਂ ਬੰਦੇ ਬਾਵਲ ਹੈ ਉਹ ਤਾਂ ਪਾਗਲ ਦੀ ਸਦਾਈ ਨੇ ਇਹ ਸੰਸਾਰੀ ਵੜਿਆਈਆਂ ਨੇ ਦੁਨੀਆਂ ਗਿਆ ਵੜਿਆਈਆਂ ਆ ਕੀ ਇਹਨਾਂ ਨੂੰ ਤਾਂ ਦੁਰਕਾਰਿਆ ਹੋਇਆ ਸੀ ਅਸੀਂ ਗੁਰਦੁਆਰੇ ਚੋ ਦਿਨ ਲੱਗੇ ਫਿਰ ਬੜਿਆਂ ਚ ਇਹੋ ਜੀ ਕੋੰਥਰਤਨ ਦੀ ਬੜੀ ਆਈਦੇ ਦੋ ਇਹ ਤੁਜੀ ਯੋ ਕਰ ਦੋ ਇਹ ਮੋ ਕਰ ਦੋ ਇਹ ਬਾਵਲੇ ਨੇ ਸਾਰੇ ਲੋਕ ਬੁੱਧੇ ਹੋਏ ਕੁਰਬਾਨੀ ਦੇ ਵਿੱਚ ਗੁਰੂ ਘਰ ਚੋ ਜੇ ਪਤਵੀ ਸੀ ਭਾਈ ਦੀ ਪਤਵੀ ਮਰਦੀ ਸੀ ਭਾਈ ਬਰਾਬਰ ਦਾ ਹੀ ਹੁੰਦਾ ਬਰਾਬਰੀ ਦੀ ਪਤਵੀ ਇੱਕ ਪਿਤਾ ਇੱਕ ਅਖੇ ਦਾ ਮਤਲਬ ਬਰਾਬਰ ਭਾਈ ਕੋਈ ਅਬਰ ਵੀ ਬਾਹ ਹੋ ਜਾਣੀ ਕੋਨਾ ਰਹਿੰਦੇ ਬਾਵਲੇ ਉਹ ਦੁਨੀਆ ਤੋਂ ਵੱਡਾ ਕਰਕੇ ਕਰਦੇ ਨੇ ਗੁਰੂ ਜੇ ਦਾਸ ਜੇ ਗੁਰੂ ਘਰ ਚੋਂ ਫੜਿਆ ਹੀ ਮਰਦੀ ਸੇ ਨੂੰ ਕਹਿੰਦੀ ਦਾਸ ਹੋ ਜਾ ਸਭ ਦਾ ਓਏ ਤਾਂ ਆਓ ਹਮਾਰੇ ਪਾਸ ਫੇੜਾਓ ਸਾਡੇ ਕੋਲ ਸਾਰਿਆਂ ਦੀ ਮਤਲਬ ਸਾਰਿਆਂ ਨੂੰ ਨੀਵੇਂ ਹੋ ਕੇ ਆਓ ਜਿਹੜੇ ਸੰਸਾਰ ਦੇ ਲੋਕ ਨੇ ਉੱਚਾ ਕਰਕੇ ਵੀ ਅਸੀਂ ਵਿਰਾਜ ਕਰਨਾ ਤੁਸੀਂ ਸਾਡੀ ਮਦਦ ਕਰੋ ਰਾਜ ਦੇ ਵਿੱਚ ਤੁਸੀਂ ਲੋਕਾਂ ਨੂੰ ਦਵਾ ਕੇ ਰੱਖੋ ਇਹ ਇਦਾਂ ਕਰਦੇ ਹੁੰਦੇ ਨੇ ਉਹ ਰਾਜ ਦੇ ਲੈਂਦੇ ਬੜੇ ਨਲਜ ਉਹ ਲੈਣ ਵਾਲੇ ਵੀ ਬੇਸ਼ਰਮ ਨੇ ਬਣੀ ਜਦਾ ਮਤ ਇਹ ਹੈ ਚੂਹਾ ਕੱਢ ਨਾ ਮਾਵੀ ਖੱਟ ਕਹਿੰਦੇ ਛੋਟੀ ਆ ਚੂਹਾ ਹੋ ਗਿਆ ਵੱਡਾ ਮੁਕਤ ਦੁਆਰਾ ਹੰਕਾਰ ਆ ਚੂਹਾ ਹੋ ਗਿਆ ਫਾਠੀ ਫਾਠੀ ਨੂੰ ਦੁਆਰੇ ਇਕੱਲੇ ਬੜੇ ਹੰਕਾਰ ਹੋ ਗਿਆ ਵੱਡਾ ਰਕਾਰ ਕਿੱਡਾ ਅਸਮਾਨ ਦੇ ਵਿੱਚ ਨਹੀਂ ਵੇਉਂਦਾ ਵੱਡਾ ਆਕਾਸ਼ ਹੈ ਵੀ ਵੱਡਾ ਹੰਕਾਰ ਚੂਹਾ ਚੂਹਾ ਮਨ ਨੇ ਮਨਾਈਦਾ ਵੱਡਾ ਹੰਕਾਰੀ ਹੋ ਗਿਆ ਕਿ ਆਕਾਸ਼ ਵੀ ਛੋਟਾ ਲੱਗਦਾ ਮਾਵੀ ਚੱਕਰ ਬੰਨ੍ਹੇ ਛੱਜ ਹੋਮਕਾਰੀ ਦਾ ਪਹਿਲਾਂ ਹੀ ਇੱਕ ਛੱਜ ਹੋਰ ਆ ਕੋਲਾਂ ਦਾ ਛੱਜ ਹੋਰ ਬਣਦਾ ਇਤੇ ਨਾਲ। ਦਾ ਮਤਲਬ ਕੀ ਅੰਦਾਜ਼ੀ? ਇਹ ਹੁੰਦਾ ਸੀ ਜੇ ਮਿਆਂਨ ਹੁੰਦਾ ਤਲਵਾਰ ਵਿੱਚ ਹੁੰਦੀਆਂ ਮਿਆਂਨ ਦੇ। ਮਾਵਈ ਦਾ ਮਤਲਬ ਵਿੱਚ ਸਬੂ ਦਾ ਉਹ ਤੇ ਨਹੀਂ ਸੀ ਜੂ। ਬਰੀਕ ਖੱਡਦਾ ਹੋਰ ਛੋਟਾ ਸੀ ਚੂਹੇ ਦਾ ਆਕਾਰ ਵੱਡਾ ਸੀ। ਆ ਬਾਹਰ ਰਹਿੰਦਾ ਸੀ ਖੱਡਦਾ ਹੋਰਦੇ ਜੋ ਚੂਹਾ ਰਹਿੰਦਾ ਸੀ ਬਾਹਰੇ ਕਾਲ ਦੇ ਗ੍ਰਿਫਤ ਚ ਆ ਜਾਂਦਾ ਸੀ। ਜੇ ਚੂਹਾ ਬਾਹਰ ਰਹੂ ਤਾਂ ਖਤਰਾ ਖੱਡ ਕੇ ਵੱਡੀ ਹੈ। ਠੀਕ ਹੈ ਜੀ ਦੇਣ ਦਵਾਈ ਸੇ ਮਰੈ ਜਿੰਨ ਕੋ ਦੇਣ ਸੇ ਜਾਹੈ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੀ ਇਹਦਾ ਪਹਿਲੀ ਪੰਕਤੀ ਦਾ ਆਗੀ ਸੰਸਾਰੀ ਜਿਹੜੇ ਰਾਜੇ ਦੇ ਉਹਨਾਂ ਦੇ ਪੁਰਾਣੇ ਬਾਬਲੇ ਉਹਨਾਂ ਨੂੰ ਕਹਿਤਾ ਹੁਣ ਆਗੇ ਆਇ ਪਸਤਰੇ ਫਕੀਰ ਦੇ ਗੁਰੂ ਬਣੇ ਬੈਠੇ ਨੇ ਧਰਮ ਦੀ ਦੁਨੀਆ ਦੇ ਵਿੱਚ ਰਾਜੇ ਲੋਕ ਬਣੇ ਹੋਏ ਨੇ ਜਿਨ੍ਹਾਂ ਦੀ ਮਗਰ ਬਹੁਤ ਪਬਲਿਕ ਹੈ ਹੁਣ ਉਹਨਾਂ ਵੱਲ ਲੈ ਲੈ ਦੇਣ ਦਵਾਈ ਉਹ ਆਪ ਬਣੇ ਬੈਠੇ ਨੇ ਦਵਾਈ ਦਿੰਦੇ ਨੇ ਮੌਤ ਦੀ ਇਹ ਬੋਧਾਲਾਜ ਕਰਦੇ ਨੇ ਧਰਮ ਦੇ ਵਿੱਚੋਂ ਤੇ ਮਰੇ ਉਹ ਆ ਮਰੀ ਜਾਂਦੇ ਨੇ ਉਹਨਾਂ ਦੀਆਂ ਵਰਤیاں ਮਨਾਉਂਦੇ ਨੇ ਆ ਦੇਖੋ ਕਿਵੇਂ ਮਹਾਪੁਰਖ ਬਣਾਏ ਹੋਏ ਨੇ ਇਹਨਾਂ ਨੇ ਉਹ ਮਹਾਪੁਰਖ ਮਰਦੇ ਹੁੰਦੇ ਨੇ ਮਹਾਪੁਰਖ ਦੀ ਤਾਂ ਬਾਣੀ ਹੈ ਇਹ ਬਾਣੀ ਮਹਾਪੁਰਖ ਦੀ ਉਹ ਕਹੋਦੇ ਨੇ ਮਹਾਪੁਰਖ ਮਨਾਉਂਦੇ ਨੇ ਵਰਤਿਓ ਕੀ ਜਿਵੇਂ ਗੱਲ ਗਈ ਮਰਦੇ ਗਿਆ ਉਹਦੀ ਜਗ੍ਹਾ ਫਿਰ ਗੱਦੀ ਤੇ ਧੂਆ ਬਹਿੰਦਾ ਪਰਮੇਸ਼ਰ ਕਦੇ ਮਰਿਆ ਉਹਦੀ ਗੱਦੀ ਤੇ ਕੋਈ ਬੈਠਿਆ ਕਦੇ ਉਹਦੀ ਕੋਈ ਵਰਤੀ ਮਨੂਨ ਹੈ ਅਜੇ ਲੀਨ ਹੋ ਗਏ ਜਿਉਂਦੇ ਪਰਮੇਸ਼ਰ ਤੇ ਉਹਨਾਂ ਦੀ ਬਸਤੀ ਨਹੀਂ ਬਣਾਈ ਕੌਣ ਕਹੇ ਸਤਗੁਰ ਮਰਯੋ ਕਿਹੜਾ ਕਹਿੰਦਾ ਸਤਗੁਰ ਮਰ ਗਿਆ ਭਾਈ ਜਿਹੜਾ ਪਾਗਲ ਹੈ ਉਹ ਬੇਵਕੂਫ ਹੈ ਦੇਣ ਦਵਾਈ ਸਿਮਰਾਂ ਜਿਹੜੇ ਦਵਾਈਆਂ ਦਿੰਦੇ ਨੇ ਲੋਕਾਂ ਨੂੰ ਵੈਦ ਬਣੇ ਬੈਠੇ ਨੇ ਖੁਦ ਮਰੀ ਜਾਂਦੇ ਨੇ ਜਿੰਨਕੋ ਦੇਣ ਸੇ ਵੀ ਜਾਂਦੇ ਨੂੰ ਦਵਾਈ ਦਿੰਦੇ ਨੇ ਉਹ ਵੀ ਮਰੀ ਜਾਂਦੇ ਨੇ ਅੱਜ ਚੈਲੰਜ ਅੱਚਖੀ ਰੂਹ ਹੈ ਸਿੱਖਾਂ ਨੂੰ ਸਿੱਖ ਨਹੀਂ ਮਰ ਸਕਦਾ ਗੁਰੂ ਕਾ ਜੇ ਹੋਵੇ ਕਿਉਂਕਿ ਉਹਦਾ ਸਤਗੁਰ ਨਹੀਂ ਮਰਦਾ ਸਤਗੁਰ ਵੀ ਨਾ ਮਰਦਾ ਸਤਗੁਰ ਮੇਰਾ sada sada ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪ੍ਰਕਾਸ਼ ਸਭ ਮੇਰਾ ਜੇ ਸਤਗੁਰ ਅਵਨਾਸ਼ੀ ਹੈ ਤਾਂ ਉਹਦਾ ਸਿੱਖਾ ਜਿਹੜਾ ਉਹ ਵੀ ਅਵਨਾਸ਼ੀ ਉਹ ਜਾਗਿਆ ਹੋਇਆ ਜਾਗਰੂਕ ਗੁਰ ਸਤਗੁਰ ਕਾ ਜੇ ਸਿੱਖ ਕਾਏ ਤਾਂ ਭੜਕੇ ਉੱਠ ਉੱਠੂਗਾ ਜਾਗੂਗਾ ਉਹ ਮਰੀ ਜਾਂਦੇ ਨੇ ਤੇ ਜਿਹਨਾਂ ਨੂੰ ਹੁਕਮ ਉਪਦੇਸ਼ ਕਰਦੇ ਨੇ ਉਹ ਵੀ ਮਰੀ ਜਾਂਦੇ ਨੇ ਨਾਨਕ ਕਹਿੰਦਾ ਹੁਕਮ ਨਾ ਜਾਪੀ ਜਿਹਨਾਂ ਜਿਹੜੇ ਹੁਕਮ ਦੀ ਸਮਝ ਨਹੀਂ ਆਉਂਦੀ ਹੁਕਮ ਦੀ ਗੁਝਿਆ ਉਹਨਾਂ ਜਿਹੜੇ ਨਹੀਂ ਪਤਾ ਲੱਗਦਾ ਕਿੱਥੇ ਜਾਏ ਸਮਾਏ ਇਹਨਾਂ ਨੂੰ ਨਹੀਂ ਪਤਾ ਕਿੱਥੇ ਜਾ ਕੇ ਸਮਾਏ ਕਿੱਥੇ ਸਮਾਈਦਾ ਸਮਾਣਾ ਕਿੱਥੇ ਆਏ ਇਹ ਗੱਲ ਦਾ ਨਹੀਂ ਪਤਾ ਹੈ ਹੁਕਮ ਦੀ ਸਮਾਉਣੇ ਜਿਹੜਾ ਹੁਕਮ ਨਾ ਸਮਾਇਆ ਉਹ ਜਾਂਦਾ ਹੈ ਨਹੀਂ ਸਮਾਇਆ ਜਾਂ ਹੁਕਮ ਨਹੀਂ ਜਾਪਿਆ ਹੁਕਮ ਦੀ ਸਮਝ ਨਹੀਂ ਆਈ ਤਾਂ ਪਰੋ ਦਵਾਈ ਦੇਣ ਵਾਲੇ ਵੀ ਮਰ ਗਏ ਲੈਣ ਵਾਲੇ ਵੀ ਮਰ ਗਏ ਕੋ ਕੋ ਨਾ ਕਿਸ ਨੇ ਪੁਜਾਇਆ ਨਾ ਕਿਸ ਨੇ ਪੁਜਾਇਆ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਉ ਮੈਂ ਮਹਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਫਸਲ ਆਹਾੜੀ ਆੜੀ ਕਹਿੰਦੇ ਨਹੀਂ ਜੜੀ ਅਸੀਂ ਖਰੀਫ ਦੀ ਜਿਹਨੂੰ ਕਹਿੰਦੇ ਹਕਣਕ ਦੀ ਫਸਲ ਨੂੰ ਆੜੀ ਸੋਣੀ ਸਾਵਣੀ ਲਿਖਿਆ ਸੋਣੀ ਨਹੀਂ ਲਿਖਿਆ ਇੱਥੇ ਆਹਾੜੀ ਲਿਖਿਆ ਹਾੜੀ ਨਹੀਂ ਲਿਖਿਆ ਸਾਡੇ ਹਾੜੀ ਕਹਿੰਦੇ ਨੇ ਆੜਾ ਬੂਰੇ ਪਾਇਆ ਹਾਂਜੀ ਹਾਂ ਅਸੀਂ ਹਾੜੀ ਕਹਿੰਦੇ ਇਹ ਆਹਾੜੀ ਲਿਖਿਆ ਉੱਤੇ ਸਾਵਣੀ ਹੈ ਅਸੀਂ ਸੋਣੀ ਕਹਿੰਦੇ ਫਸਲੀ ਆਹਾੜੀ ਇੱਕ ਨਾਮ ਵੱਡੀ ਫਸਲ ਆਹਾੜੀ ਦੀ ਮੰਨੀ ਜਾਂਦੀ ਹੈ ਸੋਣੀ ਦੀ ਫਸਲ ਜਿਹੜੀ ਹੈਗੀ ਹੈ ਉਹ ਛੋਟੀ ਫਸਲ ਮੰਨੀ ਜਾਂਦੀ ਹੈ ਪਹਿਲੀ ਸੋਣੀ ਦੀ ਫਸਲ ਹੈ ਦੂਜੀ ਫਸਲ ਆਹਾੜੀ ਦੀ ਦੇਖਤੇ ਜਾ ਕੇ ਪੂਰਾ ਸਾਲ ਮੰਨਿਆ ਜਾਂਦਾ ਹੈ ਜਿਹਨੂੰ ਨਮਾਣੀ ਕਾਸਤੀ ਅੱਗੇ ਕਹਿੰਦੇ ਬਾਅਦ ਅਪ੍ਰੈਲ ਜਾ ਕੇ ਸਮਝ ਲੋ 31 ਮਾਰਚ ਨੂੰ ਸਾਲ ਪੂਰਾ ਮੰਨਿਆ ਜਾਂਦਾ ਆ ਆਹਾੜੀ ਇੱਕ ਨਾਮ ਜਿਹੜੀ ਸਾਡੀ ਆਹਾੜੀ ਦੀ ਫਸਲ ਹੈ ਨਾ ਖਲਵਾੜਾ ਇਸੇ ਦਾ ਖਲਵਾੜਾ ਹੁੰਦਾ ਹੈ ਦਾ ਹੀ ਕੋਈ ਬੀਜਾਂ ਕੋਲਣਾ ਕੋ ਪਾਵਾਂ ਖਲਿਆ ਖਲਵਾੜ ਕੋਈ ਜੀਦਾ ਕੋਈ ਕਹਿੰਦੇ ਵੜਦਾ ਕੋਈ ਖਲਵਾੜਾ ਲਾਉਂਦਾ ਉਹਦਾ ਜਦੋਂ ਕੋਣੇ ਹੁੰਦੇ ਸੀ ਬਰਦਾਨਾ ਇਹ ਵੀ ਆਖ ਨਾ ਜਾਪੀ ਖਾਏ ਕੌਣ ਨਿਦਾਨ ਉਹ ਪਾਏ ਖਲਿਆਣ ਖਲਿਆਣ ਦੀ ਖਲਵਾੜ ਖਲਿਆਣ ਖਲਿਆਣ ਕੋਈ ਬੀਜੇ ਕੋਲੋਂ ਨੇ ਕੋਈ ਬੀਜਦਾ ਹੈ ਕੋਈ ਉਹਨੂੰ ਚੁੱਕਦਾ ਹੈ ਅਗਰੇ ਇਹ ਜੀ ਫਸਲ ਹੁੰਦੀ ਚੋਣ ਵਾਲੀ ਹੁੰਦੀ ਧੱਕੇ ਧੱਕੇ ਨਾਮ ਦੀ ਫਸਲ ਅਹਾੜੀ ਦੀ ਫਸਲ ਅੱਛਾ ਜੀ ਫਸਲ ਅਹਾੜੀ ਇੱਕ ਨਾਮ ਸਾਵਣੀ ਸੱਚ ਨਾਮ ਸਾਵਣੀ ਸੱਚ ਨਾਮ ਹੈ ਸਿੱਧੀ ਸਾਵਣੀਆਂ ਉਹਦੇ ਵਰਗੀ ਬਣ ਜਾਂਦੀ ਹੈ। ਉਹ ਨਾਮ ਨਾਲ ਜਿਹੜਾ ਰਬਾਨੀ ਚ ਨਾਮ ਹੈ ਗਿਆਨ ਇਹਦੇ ਨਾਲ ਉਹਦੇ ਵਰਗੀ ਬਣ ਜਾਂਦੀ ਹੈ ਉਹਦੇ ਵਿੱਚ ਜਿਵੇਂ ਪਹਿਲਾਂ ਧਾਣੇ ਹੁੰਦੇ ਨੇ ਫਿਰ ਫਿਰ ਸਾਡੀ ਦੀ ਫਸਲ ਹੁੰਦੀ ਹੈ। ਫਿਰ ਉਹੀ ਫਸਲਾ ਗਣਕ ਫਿਰ ਸਾਨੂੰ ਮਿਲ ਜਾਂਦੀ ਹੈ ਖਾਣ ਵਾਸਤੇ। ਸਾਵਣੀ ਸੱਚ ਨੂੰ ਉਹਦਾ ਹੀ ਰੂਪ ਹੋ ਗਈ ਉਹੋ ਜਿਹਾ ਬਣ ਗਈ ਜਿਹਾ ਜਿਹਾ ਮੂਲ ਰੂਪ ਸੀ ਨਾ, ਸ਼ੁੱਧ ਰੂਪ ਆਤਮਾ ਦਾ। ਸ਼ੁੱਧ ਰੂਪ ਹੋ ਜਾਣਾ, ਵਕਾਰਾਂ ਤੋਂ ਰਹਿਤ ਹੋ ਜਾਣਾ। ਕਿਸਹਾਵਲੀ ਹੈ ਰਾਖਾ ਜਾਣਾ ਛਾਵਣ ਸਰਤੀ ਕਾਮਨੀ ਬੜੀ ਬੁੱਧ ਸੀ ਬਵੇਖ ਬੁੱਧ ਦੇ ਵਿੱਚ ਬਦਲ ਦੇ ਵਿੱਚ ਇੱਕ ਨਾਮ ਮਿਲਦਾ ਜੀ ਆਖੀ ਆਖਰੀ ਫਸਲ ਹੈ ਨਾ ਅੱਛਾ ਇਹ ਤੇ ਸਾਵਣੀ ਪਹਿਲੀ ਫਸਲ ਹੈ ਹਾਂ ਹਾਂ ਔਕਾ ਔਕਾ ਉਹਦਾ ਜਾਨ ਕੰਮ ਹੈ ਠੀਕ ਹੈ ਜੀ ਥਰੀਰ ਤੋਂ ਭਰੇ ਭਰੇ ਦੀਆਂ ਗੱਲਾਂ ਨਹੀਂ ਸਭ ਇਹ ਮੈਂ ਮਹਦੂਦ ਲਿਖਾਇਆ ਕਸਮੈ ਕਾਦਰ ਜਾਏ ਦੁਨੀਆ ਕੇਦਰ ਕੇ ਤੜੇ ਕੀਤੇ ਆਵੇ ਜਾਹੇ ਕੀਤੇ ਮੰਗੈ ਮੰਗਤੇ ਕੀਤੇ ਮੰਗ ਮੰਗ ਜਾਹੀਂ ਮੈਂ ਮਹਿਦੂਦ ਲਖਾਇਆ ਖਸਮੈ ਕੇਦਰ ਜਾਏ ਕਾ ਪੇਸ਼ੀ ਹੋਈ ਤਾਂ ਜਿਹੜਾ ਮੈਂ ਬੋਲਦਾ ਸੀ ਉਹਨੂੰ ਮਹਿਦੂਦ ਕਰਤਾ ਉਹਨੂੰ ਪਰਮਦੇ ਅੰਡੇ ਚ ਬੰਦ ਕਰਤਾ ਉਹਦੇ ਕੋ ਗਿਆਂਦੀ ਕਾੜਤੀ ਪਰਬ ਦੇ ਅੰਡੇ ਚ ਬੰਦ ਕਰਤਾ ਹੱਲੇ ਵਾਲੇ ਭਰ ਮੈਂ ਵਿਚਾਲੇ ਜੋਤ ਹੈ ਦੁਨੀਆ ਦੇ ਦਰ ਕਿਤਲੇ ਕਿਤੇ ਆਵਾਂ ਜਾਇਂ ਦੁਨੀਆ ਦੇ ਵਿੱਚ ਜਨਮ ਲੈਣ ਦੇ ਦੇ ਵਿੱਚ ਹੁਣ ਇਹ ਦੁਨੀਆ ਦੇ ਵਿੱਚ ਆ ਸਕਦਾ ਜਨਮ ਲੈ ਸਕਦਾ ਹੈ ਲੱਖ ਜੂਨ ਜਿਸੇ ਜੂਨ ਜੀ ਪੈ ਸਕਦਾ ਸਾਰਾ ਡੋ ਅਡਲ ਕਿਤੇ ਢੁੰਗਾਂ ਢੁੰਗਤੇ ਕਿਤੇ ਤੇਰੇ ਦਰ ਦੇ ਉੱਤੇ ਬੰਗਦੇ ਜੂਨਾ ਜਨਮ ਬੰਗਦੇ ਨੇ ਕਿਤੇ ਮੰਗ ਮੰਗ ਜਾਏ ਕਿਤੇ ਮੰਗ ਮੰਗ ਕੇ ਜਨਮ ਲੈ ਕੇ ਚਲੇ ਜਾਂਦੇ ਨੇ ਹਾਂਜੀ ਅੱਛਾ ਇਹ ਆਪਣੇ ਮਾਤ ਲੋਕ ਦੀ ਗੱਲ ਹੈ ਜੀ ਹਾਂ ਲੋਕ ਦੀ ਨਾਲ ਤੁਸੀਂ ਕਹੋ ਦੇਵ ਲੋਕ ਦੀ ਗੱਲ ਕਹੋ ਤੁਸੀਂ ਇਹਨੂੰ ਲੋਕ ਆਉਣ ਨੂੰ ਤਰਸਦੇ ਨੇ ਸਾਨੂੰ ਹੁਕਮ ਦੋ ਬਾਦ ਲੋਕ ਜਾਈਏ ਜਨਮ ਲਈਏ ਅੱਛਾ ਜੀ ਇਹ ਦੇਵ ਲੋਕ ਦੀ ਗੱਲ ਹੈ ਦੇਵ ਲੋਕ ਦੀ ਗੱਲ ਹਾਂਜੀ ਮਹੱਲਾ ਪਹਿਲਾ ਸੋਮਣ ਹਸਤੀ ਕਿਉ ਗੁੜ ਖਾਵੈ ਪੰਜ ਸੇ ਦਾਣਾ ਖਾਏ ਟੱਕੇ ਪੁੱਕੇ ਖੇ ਉਡਾਵੈ ਸਾਹੇ ਗਏ ਪਛਤਾਏ ਹਾਥੀ ਜਦ ਆਪ ਪਾੜ ਲੈਂਦੇ ਹਾਥੀ ਨੂੰ ਤਾਂ ਗੜੇ ਦਾ ਗੁੜ ਖਾ ਜਾਂਦਾ ਹੈ ਆਕੇ ਉਹ ਖਾ ਜਾਂਦਾ ਕਿ ਉਹ ਖੜਾ ਆਉਂਦੇ ਨੇ ਲੋਕ ਕਿ ਉਹ ਕੇ ਖਾਉਂਦੇ ਸੀ ਰਾਜੇ ਮਹਾਰਾਜ ਹਾਥੀਆਂ ਨੂੰ ਜਿਹੜੇ ਵਧੀਆ ਘੋੜੇ ਨੇ ਪਾਲਤੂ ਨੇ ਰੇਸਾਂ 'ਚ ਭਜਦੇ ਨੇ ਬਹੁਤ ਸਾਨੂੰ ਖੜਾਉਂਦੇ ਨੇ ਹਾਥੀਆਂ ਨੂੰ ਵੀ ਖੜਾਉਂਦੇ ਸੀ ਅੱਗੇ ਜੰਗ ਹਾਥੀ ਜਾਂਦੇ ਸੀ ਜੰਗ ਲੜਦੇ ਸੀ ਜਿਹੜੇ ਵਧੀਆ ਹਾਥੀ ਸੀ ਤੇ ਉਹਨਾਂ ਨੂੰ ਕਿਉਂ ਖੜਾਉਂਦੇ ਸੌ ਗਣ ਹਸਤੀ ਕਿ ਔਰ ਘੋੜ ਖਾ ਜਾਂਦਾ ਸਾਂ ਗਲੇ ਮਣਾ ਤਾਂ 500 ਦਾਣਾ 500 ਮਣ ਦਾਣਾ ਖਾ ਜਾਂਦਾ ਸੀ ਆਟੇ ਚ ਰਲਾ ਕੇ ਘੋੜਰ ਕੇ ਹੁਸਲਦੇ ਸੀ ਉਹਨੂੰ ਕੀ ਕਰਦਾ ساری ਜ਼ਿੰਦਗੀ ਢੱਕਾ ਖੂਕਾ ਹੰਕਾਰੇ ਮਾਰਦਾ ਚੜਾਣ ਲੈਂਦਾ ਛੱਟ ਭਰ ਕੇ ਪੂਰਾ ਖਾਦਾ ਖੇੜਾ ਉਹ ਹੈ ਇਹ ਖੇੜ ਆਉਂਦਾ ਇਹਦੇ ਨਾਲ ਪੈਰਾਂ ਨਾਲ ਉੱਤੇ ਵੀ ਖੇਪਾ ਲੈਂਦਾ ਮਿੱਟੀ ਹੱਥੀਂ ਤੋਂ ਕਹਿੰਦੇ ਜਿਹਨੂੰ ਰਾਦੀ ਉੱਤੇ ਖੇਪਾ ਲੈਂਦਾ ਫੇਰ ਆਹ ਕੁਛ ਕਰਦਾ ساری ਜ਼ਿੰਦਗੀ ਢੱਕਾ ਖੂਕਾ ਖੇੜਾ ਉਹ ਹੈ ਪਛਤਾਏ ਜਾਂ ਮਰ ਜਾਂਦਾ ਫੇਰ ਉਹ ਪਛਤਾਉਂਦਾ ਵੀ ਲੈ ਵੀ ਇੰਦੀ ਸੇਵਾ ਕੀਤੀ ਏ ਮਰ ਗਿਆ ਹਾਥੀ ਪਰ ਟੌਨਰ ਤਾਂ ਕਿਉਂ ਖਰਚਾ ਬਹੁਤ ਕੀਤਾ ਇਹਨਾਂ ਗੁੜ ਖਲਾਤਾ ਇਹਨਾਂ ਕਿਉਂ ਫੜਾਤਾ ਸਰੀਰ ਦੀ ਇਹੀ ਗੱਲ ਹੈ ਜਿਹੜੇ ਬੜੇ ਬੜੇ ਸਤਿ ਦੇ ਜਿਹੋ ਨੇ ਬੜਬੜੀਓ ਦੇਹਾਂ ਪਾਲੀਆਂ ਹੋਈਆਂ ਨੇ ਅਸਲ ਤੇ ਇਸ਼ਾਰਾ ਉਹਨਾਂ ਵੱਲ ਹਾਥੀ ਦਾ ਤਾਂ ਇੱਕ ਪ੍ਰਮਾਣ ਹੀ ਉਪਦੇਸ਼ ਕਿਹੜੇ ਹਾਥੀ ਨੂੰ ਦੇਣਾ ਆਹ ਕਿਹੜੇ ਹਾਥੀ ਨੂੰ ਦੇਣਾ ਹੀ ਹਾਥੀ ਦੇ ਬਣੇ ਹੋਏ ਉਹ ਜਿਹੜੇ ਉਪਦੇਸ਼ ਕਰਦੇ ਨੇ ਛਾਤੀਆਂ ਠੋਕ ਠੋਕ ਕੇ ਉੱਚੀ ਉੱਚੀ ਹੋ ਡਾ ਕੇ ਫੁੱਕੇ ਗੱਲ ਹੈ ਕੱਪ ਜੀ ਲੋ ਤੁੰਗੀ ਰੱਖ ਕੇ ਕਿਹਿਆ ਭੁਜਨ ਵਾਲੀਓ ਗੱਲ ਸਾਰੀ ਔਰ ਕਿਹੜੇ ਹੱਤੀ ਦੀ ਗੱਲ ਹੈ ਕਿਹੜੇ ਹੋੜਾ ਕਰ ਫੁੱਕੇ ਦੀ ਗੱਲ ਹਾਂਜੀ ਅੰਦੀ ਖਸਮ ਮਿਟੀ ਫਿਰ ਪਾਣੀ ਖਸਮਾਂ ਸਾਹਮਣੇ ਜੇ ਆਪਣੇ ਆਪ ਨੂੰ ਮਟਾਤਾ ਉਹਨੇ ਪਾਣਾ ਬੰਦ ਲਿਆ ਫਿਰ ਪਾਣੀ ਫਿਰ ਉਹ ਕਹਿੰਦੇ ਪਾਣੇ ਚਾਹੀਏ ਫਿਰ ਭਾਈ ਭਾਈ ਖਸਮ ਨੂੰ ਜੇ ਖਸਮ ਦੇ ਸਾਹਮਣੇ ਆਪਣੇ ਆਪ ਨੂੰ ਬਚਾਤਾ ਫੇਰ ਉਹ ਕਹਿੰਦਾ ਜਦੋਂ ਜਿੰਨਾ ਜੇ ਡਾਕਾ ਫੂਕਾ ਖੇੜਾ ਬਹਿ ਉਹਨਾਂ ਚੱਦੀ ਉਹ ਕੋ ਕਰਤਾ ਬੁੱਢੀ ਨੇ ਫੇਰ ਉਹ ਕਹਿੰਦਾ ਜੇ ਬੁੱਢੀ ਆਪਣੀ ਗਾਵੇ ਕਰੀ ਜਾਂਦੀ ਹੈ ਫੇਰ ਦੀ ਗੱਲ ਵਾ ਤੇ ਤਾਂ ਉਹ ਹਾਥੀ ਵਾਲੀ ਉਹ ਗੱਲ ਹੈ ਠੀਕ ਹੈ ਜੀ ਖਸਮ ਹੀ ਮਿਟੀ ਖਸਮ ਦੇ ਅੱਗੇ ਮਿਟ ਗਈ ਉਹ ਹਾਂ ਜੀ ਫੇਰ ਭਾਈ ਆ ਮਟਾ ਦੇ ਆਪਣੀ ਹਸਤੀ ਵੀ ਮਟਾ ਦੇ ਹਾਂ ਚਿੜੀ ਕਾ ਚੁਗਣ ਗੈਣ ਚੜੀ ਬਿ ਲਾਏ ਖਸ਼ਮੇ ਭਾਵੇ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਆ ਜਾਣ ਕਿ ਨਹੀਂ ਹੁੰਦੀ ਐ ਨਾ ਕੀ ਖਾ ਲੈਣਾ ਚਿੜੀ ਦੇ ਖਾਣ ਵੀ ਲੱਗੇ ਉਹਕੀ ਦੇ ਦਾਣੇ ਨੂੰ ਅੱਧੀ ਚਲੇ ਖਾ ਹੁੰਦੀ ਆ ਤੇ ਇਹਦਾ ਤਾਂ ਅੱਧ ਕੁ ਜਿਹੜਾ ਚਿੜੀ ਦਾ ਚੁਗਣ ਅਸਲ ਦੇ ਵਿੱਚ ਨਾ ਆ ਆ ਚੋਗਾ ਆਤਮਾ ਦਾ ਚੋਗਾ ਨਹੀਂ ਇਹਦਾ ਚੋਗਾ ਗਿਆਨ ਆ ਧਾਮ ਆ ਸੰਸਾਰ ਦਾ ਚੋਕਾ ਸੰਸਾਰੀ ਗਿਆਨ ਆ ਜਾਂ ਫਿਰ ਸੰਸਾਰੀ ਪ੍ਰਾਰਥਾ ਇਹਦਾ ਸਾਰਾ ਚੋਕਾ ਕਿڑی ਦਾ ਨਹੀਂ ਹੈ ਹਰ ਕਿਸਮ ਦਾ ਚੋਕਾ ਚੁੜੀ ਦਾ ਚਿੱਡੀ ਦਾ ਚੋਕਾ ਨਹੀਂ ਹੈ ਸਾਡਾ ਚੋਕਾ ਕੀ ਹੈ ਸਾਡਾ ਨਾਮ ਅੱਧ ਚ ਨਾਮ ਖੜਾ ਅੱਧ ਚ ਸੰਸਾਰ ਖੜਾ ਇਹਨਾਂ ਸੰਸਾਰ ਪੈਦਾ ਕੀਤਾ ਸਾਡਾ ਚੋਕਾ ਉਹਦੇ ਨਾਲ ਜਿਹੜਾ ਸੰਸਾਰ ਪੈਦਾ ਹੋਈ ਹੋਈ ਚੀਜ਼ ਹੈ ਜੋ ਸੰਸਾਰ ਦੇ ਵਿੱਚ ਉਹ ਸਾਡਾ ਚੋਕਾ ਵੀ ਸ਼ਰੀਰ ਦਾ ਚੋਕਾ ਹੋ ਸਕਦਾ ਸਾਡਾ ਵੀ ਕੁੱਲਾ ਨਹੀਂ ਖਾਣਾ ਤਾਂ dane ਖਾਣੇ ਦੇ ਗੈਣ ਚੜੀ ਬਿੱਲਾ ਏ ਗੈਣ ਆਕਾਸ਼ ਨੂੰ ਕਹਿੰਦੇ ਨੇ ਇਹ ਬਿੱਲ ਆਉਂਦੀ ਏ ਗੈਣ ਜਿਹੜੀ ਬਿੱਲ ਲਾਏ ਜੇ ਕੋਈ ਜਿਉਂਦਾ ਚੜ ਜਾਏ ਗੈਣ ਤਾਂ ਉਹ ਹੋਰ ਆਪਣਾ ਹੋਰ ਕਿ ਸਮਝਦਾ ਜੇ ਕੋਈ ਮਰ ਕੇ ਚੜੇ ਉਹਦਾ ਵੀ ਲਾਭ ਹੋਰ ਤੇ ਖੁਸ਼ੀ ਖੇੜੇ ਦੀ ਗੱਲ ਦੋਏ ਗੱਲਾਂ ਨੇ ਬਿੱਲ ਲਾਉਣਾ ਜਿਹੜੀ ਦਾ ਚੁਗਣਾ ਇਹ ਇਹ ਗਿਆਨ ਲੈਣ ਦੀ ਉਹ ਗੱਲ ਹੈ ਸਰੀਰ ਦੇ ਪਦਾਰਥਾਂ ਤੋਂ ਐਂ ਕਹਦਾ ਵੀ ਸਰੀਰ ਦੇ ਪਦਾਰਥ ਮੇਰੇ ਪਦਾਰਥ ਨਹੀਂ ਹੈਗਾ ਤੇ ਸਮਝ ਲਈ ਫੇ ਤਾਂ ਕਹਿਣ ਚੜੀ ਹੈ ਜੇ ਤਾਂ ਉਸ ਦੀ ਗੱਲ ਸਮਝ ਲਈ ਇੰਨਾ ਗੁੱਲਾ ਕੀ ਹੁੰਦਾ ਹੈ ਤੇ ਕਹਿਣ ਚੜੀ ਹੈ ਗੁੱਲਾ ਜਿਆਦਾ ਖਾਂਦੀ ਹੈ ਦਾਣੇ ਖਾਂਦੀ ਨਹੀਂ ਫੇਰ ਫੇ ਰੈਣ ਚੜੀ ਹੈ ਫੇ ਚੜੀ ਹੋਈ ਹੈ ਹੰਕਾਰ ਵੀ ਅਸਮਾਨ ਨੂੰ ਚੜਾ ਦਿੰਦਾ ਅਸਮਾਨ ਨਾਲ ਆ ਗਈ ਉੱਤੇ ਆ ਗਿਆ ਨਾ ਹੰਕਾਰ ਵੀ ਅਸਮਾਨ ਤੋਂ ਉੱਚਾ ਕਰ ਦਿੰਦਾ ਆ ਜਿਹੜਾ ਗਿਆਨ ਹੈ ਵੀ ਉੱਚਾ ਕਰ ਦਿੰਦਾ ਪਾ ਜਿਹੜਾ ਹੰਕਾਰ ਦੇ ਵਿੱਚ ਉੱਚਾ ਹੋਇਆ ਹੋਇਆ ਸਰਚੂਚਾ ਨਹੀਂ ਹੋਇਆ ਹੋਇਆ ਦੁੱਖੇ ਖੜਾ ਹੀ ਕਰਿਆ ਹੈ। ਕਿਨ ਲਾਇਲ ਅਫਜ਼ਾ ਪਛਤਾਇ ਲਫਜ਼ ਦੀ ਹੈ। ਪਛਤਾਇ ਲਫਜ਼ ਉਹ ਦਾ ਇਕੱਲੇ ਅਗਿਆਨੀ ਵਾਸਤੇ ਹੁੰਦਾ ਬਿਲ ਲਾਇਲ ਅਫਜ਼ ਸਾਂਝ ਹੈ। ਕਿਨ ਲਾਇ ਉਹ ਕਹਿੰਦੇ ਜਦੋਂ ਆਣਾ ਰਾਂ ਇੱਕ ਬੂੰਦ ਜਨਕਾਰ ਨੇ ਚਾਤਰਕ ਦੁੱਖ ਪਾਵਾ ਇਹ ਬਿਲ ਆਏ। ਕਹਿੰਦੇ ਹੁਣ ਬੂੰਦ ਵੀ ਦੇ ਦੇ ਤੂੰ ਆਪਣੀ ਗੋਣੂ ਜਿੱਦੀ ਆਦਾ ਮੈਂ ਲੈ ਲਿਆ ਥੱਲੇ ਵਾਲਾ। ਉਹ ਬਿੱਲ ਲਾਹ ਦੋਹਾਂ ਦਰਫਾਂ ਦਾ ਬਿੱਲ ਆਉਣਾ ਹੈ ਹਾਂਜੀ ਹਾਂ ਖਸਮੇ ਭਾਵੇ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ ਤੇਰਾ ਬਿੱਲ ਲਾਪ ਖਸਮ ਨੂੰ ਜੇ ਭਾ ਜਾਏ ਉਹ ਚੰਗਾ ਉਹ ਕਿਹੜਾ ਬਿੱਲ ਜੇ ਕਰੇ ਖੁਦਾਏ ਖੁਦਾਏ ਤੇ ਖੁਦਾਏ ਖੁਦਾਏ ਦਾ ਬਿੱਲ ਕਰਦੀ ਏ ਫੇਰ ਚੰਗੀ ਜੇ ਇਹ ਨਹੀਂ ਕਰਦੀ ਕਾਰਜ ਜਦੋਂ ਲਾਪ ਕਰਦੀ ਹੈ ਕਿਸੇ ਆਦਮੀ ਨੂੰ ਚੰਗਾ ਚੰਗਾ ਕਹਿੰਦੀ ਹੈ ਜੇ ਕਾਦਰ ਨੂੰ ਛੱਡ ਕੇ ਕਿਸੇ ਆਦਮੀ ਦੀ ਤਾਰੀਫ ਕਰਦੀ ਹੈ ਫੇਰ ਨਹੀਂ ਜੰਮੀ ਹੈ ਉਸ ਵਿਅਕਤੀ ਦੀ ਤਾਰੀਫ ਕਰਦੀ ਹੈ ਜਿਹੜੇ ਵਿਅਕਤੀ ਨੇ ਧਰਮ ਬਣਾਇਆ ਲੋਕ ਉਹਨਾਂ ਨਾਲ ਜੁੜ ਗਏ ਜਿਹੜੇ ਫਿਰਤੀਆਂ ਨੇ ਗ੍ਰੰਥ ਲਿਖੇ ਨੇ ਜਿਹਦੇ ਬਾਰੇ ਲਿਖੇ ਨੇ ਉਹ ਛੱਡ ਦਿੱਤਾ ਲਿਖਣ ਵਾਲਾ ਫੜ ਲਿਆ ਖੁਦਾਏ ਖੁਦਾਏ ਉਹਨਾਂ ਨੇ ਕਿਹਾ ਸੀ ਖੁਦਾ ਨੂੰ ਛੱਡ ਕੇ ਉਹ ਵਿਅਕਤੀ ਫੜ ਲਿਆ ਉਹਦੀ ਖਸਮ ਨੂੰ ਬੋਧੀ ਹਾਂਜੀ ਮਾਰੇ ਸਹਿ ਮਿਰਿਆ ਸਭ ਪਿੱਛੇ ਪੈ ਖਾਈ ਕੋਈ ਸਤਾਣਾ ਘੂਰੇ ਨਾ ਮਾਵੈ ਸਾਹਿ ਗਇਆ ਪੁਛਤਾਈ ਸ਼ਕਤ ਜਿਹੜਾ ਹੁੰਦਾ ਕੇਤੀ ਜੇਹੀ ਹੁੰਦਾ ਜਿਵੇਂ ਰਾਜੇ ਸਿੰਘ ਮੁਕਤਮ ਕੁੱਤੇ ਐ ਮਰੀਆ ਉਹ ਉਹਨਾਂ ਨੂੰ ਮਾਰ ਸਕਦਾ ਸ਼ਕਤ ਜਿਹੜੇ ਉਹਦੇ ਮੰਗਰ ਲੱਗ ਜਾਣ ਜਿਹੜੇ ਉਹਦੀ ਗੱਲ ਮੰਨ ਲੈਣ ਜਿਹੜੇ ਉਹਦੇ ਚੇਲੇ ਬਣ ਜਾਣ ਉਹਨਾਂ ਨੂੰ ਵੀ ਮਾਰ ਸਕਦਾ ਆਪਣੀ ਜਾਨਦਿਆਂ ਨੂੰ ਮਾਰ ਸਕਦਾ ਆਦਮੀਆਂ ਨੂੰ ਆਦਮੀ ਘਰਾਏ ਪਾ ਸਕਦਾ ਜਾਨਵਰਾਂ ਨੂੰ ਵੀ ਘਰਾਏ ਪਾ ਸਕਦਾ ਸਾਰੇ ਜਾਲਮਾਨਾਂ ਦਾ ਵਿਸ਼ੇਸ਼ ਧਰਮ ਹੈ ਇਹ ਧਰਮ ਆਦਮੀ ਦਾ ਵਿਸ਼ੇਸ਼ ਐ ਮਰਿਆ ਤਾਂ ਪਿੱਛੇ ਪੈ ਖਾਏ ਬਾਕੀ ਸਾਰੇ ਖਾਣੇ ਵਾਲੇ ਉਹਦੇ ਛੇਲੇ ਹੁੰਦੇ ਨੇ ਉਹਨਾਂ ਨੂੰ ਬਰਗਲਾਣ ਕੇ ਉਹਨਾਂ ਤੋਂ ਤਾਂ ਦੌਲਤ ਲਈ ਜਾਂਦਾ ਆਪਣੇ ਅਧੀਨ ਰੱਖਦਾ ਉਹਨਾਂ ਦੀ ਅਕਲ ਮਾਰ ਕੇ ਹੀ ਰੱਖਦਾ ਐ ਕਹ ਲੋ ਅਕਲ ਮਾਰ ਕੇ ਰੱਖਦਾ ਮਾਰਨ ਦਾ ਮਤਲਬ ਸਰੀਰਕ ਤੌਰ ਤੇ ਮਾਰਨਾ ਨਹੀਂ ਹੈਗਾ ਕਿਸੇ ਦੀ ਅਕਲ ਨੂੰ ਮਾਰ ਕੇ ਆਪਣੇ ਪਿੱਛੇ ਲਾ ਕੇ ਰੱਖਣ ਹੀ ਮਰਿਆ ਹੈਗਾ ਪੁਰਾਣੀ ਬੁੱਧ ਦਾ ਦੇਖੇ ਪ੍ਰਗਾਸ ਹੋਣੇ ਨਹੀਂ ਦਿੰਦੇ ਇਹ ਲੋਕ ਜਿਹੜਾ ਸਿੰਘ ਸ਼ੇਰ ਹੈ ਉਹ ਮਿਰਗਾ ਨੂੰ ਮਾਰ ਰਿਹਾ ਗੱਲ ਤਾਂ ਇਹ ਕਹੀ ਹੈ ਵੇ ਸੈਂ ਮਿਰਗਾ ਨੂੰ ਤਾਂ ਮਾਰਦਾ ਭੱਜ ਕੇ ਉਹ ਮਿਰਗਾ ਤਾਂ ਮੂਰੇ ਮੂਰੇ ਹੁੰਦੇ ਡਰਦੇ ਹੁੰਦੇ ਨੇ ਇਹ ਤਾਂ ਪੈ ਪੈਣੇ ਵਾਲਿਆਂ ਨੂੰ ਮਾਰਦੇ ਨੇ ਚੇਲੇ ਨੇ ਉਹਨਾਂ ਨੂੰ ਪੁੱਠੇਰਾ ਪਾ ਸਕਦੇ ਨੇ ਦੂਰਾਂ ਨੂੰ ਕਿਵੇਂ ਪਾ ਦੇਣਗੇ ਇਹ ਕਿਹੜੇ ਬਣ ਜਾਂਦੇ ਨੇ ਇਹਨਾਂ ਦੇ ਸ਼ਰਦਾਬਾਨ ਸ਼ਰਦਾਬਾਨ ਜਿਹੜੇ ਬਣ ਜਾਂਦੇ ਨੇ ਉਹਦਾ ਫਰੇ ਮਗਾਈ ਨੇ ਵਿਚਾਰੇ ਉਹਨਾਂ ਦਾ ਕੀ ਹੈ ਉਹ ਕਦੇ ਸਿਰ ਚੱਕਦੇ ਨੇ ਉੱਤੇ ਉਹਦੇ ਬਾਅਦ ਵੀ ਇੰਦੀ ਦੌਲਤ ਇਕੱਠੀ ਹੋ ਜਾਂਦੀ ਹੈ ਉਹ ਛੇਲੇ ਉੱਥੇ ਬਖੇ ਨੇ ਖਾਣ ਨੂੰ ਹਾਂਜੀ ਓਏ ਸਤਾਨਾ ਘੁਰੇ ਨਾ ਮਾਵੇ ਸਾਹ ਆਪ ਦੀਆਂ ਸ਼ਕਤੀਆਂ ਜਿਤਾਵੇ ਵੀ ਮੈਂ ਨਾ ਮੇਰੇ ਸ਼ਕਤੀਆਂ ਨੇ ਮੈਂ ਆਹ ਉਹ ਫਲਾਣਾ ਐ ਕਰ ਦੂੰਗਾ ਤੇ ਸੰਤਾਂ ਐ ਕਰ ਦਿੰਦੇ ਨੇ ਉਹਨਾਂ ਦਾ ਪ੍ਰਚਾਰ ਕਰੇ ਉਹ ਆਪਣੇ ਵਾਸਤੇ ਵੀ ਕਰਦਾ ਹੁੰਦਾ ਓਏ ਸਤਾਨਾ ਸ਼ਕਤੀਸ਼ਾਲੀ ਬਣ ਕੇ ਆਪਣੇ ਆਪ ਨਾ ਛੇੜਦਾ ਘਰਾ ਹੁੰਦਾ ਨਾ ਇੱਕ ਜਿਵੇਂ ਫਿਰਦਾ ਕਹਿ ਲੋ ਉਹ ਜੇ ਨਹੀਂ ਵਰ ਦਰਬਾਰੇ ਰਹਿਣਾ ਤੇਰੇ ਕੁਝੇ ਜਿਉਣਾ ਚਾਹੁੰਦਾ ਤਾਂ ਅੰਦਰ ਚਾਹਦਾ ਨਹੀਂ ਮੈਂ ਕੀ ਕਰ ਰਿਹਾ ਵੀ ਮੈਂ ਉਲਟੇ ਕਮਕਿੱਤੇ ਜਾਂ ਮਰ ਜਾਂਦਾ ਫਿਰ ਪਛਤਾਉਂਦਾ ਮੈਂ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਐ ਇਹ ਜੀ ਤਾਂ ਹੋ ਗਈ ਤੇ ਹਾਂਜੀ ਅੰਦਾ ਕਿਸ ਨੂੰ ਬੁੱਕ ਸੁਣਾਵੇ ਫਸਣਾ ਮੂਲ ਨਾ ਪਾਵੇ ਉਹ ਗਿਆਨ ਤਾਂ ਹੈ ਨਹੀਂ ਉਹ ਬੁੱਕ ਦਾ ਸ਼ੇਰ ਵਾਂਗੂ ਉਹ ਡਾਕੇ ਫੂਕੇ ਉੱਤੇ ਆ ਗਿਆ ਨਾ ਬੁੱਕਣਾ ਹੀ ਹੈ ਕਿਸਮ ਦਾ ਉਹ ਕਿਹਨੂੰ ਸੁਣਾਉਂਦਾ ਬੁੱਕ ਕੇ ਅੰਨਾ ਗਿਆਨ ਹੈ ਨਹੀਂ ਉੱਚੀ ਉੱਚੀ ਬਹਾ ਮਾਰਦਾ ਹੈ ਕਿਹਨੂੰ ਬੁੱਕ ਕੇ ਅੰਨਾ ਬੁੱਕ ਕਿੱਥੇ ਸੁਣਾ ਸਕਦਾ ਅੰਨਾ ਕਿੱਥੇ ਨੂੰ ਉਹ ਗੁਰੂ ਨੂੰ ਸੁਣਾਉਣਾ ਪਰ ਅੰਦਰਲੇ ਨੂੰ ਸੁਣਾਉਣਾ ਪਹਿਲਾਂ ਤਾਂ ਲੱਗਾ ਤੇਰਾ ਬੰਦਾ ਜੀ ਕਿਸ ਨੂੰ ਸੁਣਾਉਂਦਾ ਲੋਕ ਸੁਣਾਉਂਦਾ ਇਹ ਬੁੱਕ ਸੁਣਾਵਾ ਖਸਮਾ ਮੂਲ ਨਾ ਪਾਵਾ ਪਤੇਰੇ ਤੱਕ ਦੱਲੇ ਨੂੰ ਵੀ ਲੱਗਦਾ ਤੂੰ ਕਹਿਣਾ ਅੰਦਰਲੇ ਤੇਰੇ ਨੂੰ ਵੀ ਕਿੰਨਾ ਲੱਗਦਾ ਇਹਨਾਂ ਬਕਵਾਸ ਕਰਦਾ ਤੂੰ ਖਰ ਹੋਣੀ ਹੈ ਗੱਲਾਂ ਕਿੰਨੀਆਂ ਲੱਗਦੀਆਂ ਬੂਲ ਨਾ ਪਾਵੇ ਤੇ ਟੜਕ ਡਾਲੀ ਬਹਿ ਖਾਏ ਖਸਮੇ ਪਾਵੇ ਉਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਅੱਖ ਨੂੰ ਪ੍ਰੀਤ ਕਰੇ ਅੱਖ ਟੇਡਾ ਫੱਕ ਡਾਲੀ ਬਹਿ ਖਾਏ ਅੱਖ ਟੇਡਾ ਆਪਣਾ ਪ੍ਰੀਤ ਕਰਦਾ ਹੈ ਕੁਦਰਤੀ ਗੱਲ ਹੈ ਕਿ ਮਨ ਜਿਹੜਾ ਹੈਗਾ ਜੀਵ ਆਤਮਾ ਹੈਗੀ ਸਰੀਰ ਨਾਲ ਮਾਇਆ ਦੇ ਸਰੀਰ ਨੂੰ ਪ੍ਰੇਮ ਕਰਦੀ ਹੈ ਇਹਨੂੰ ਕਰ ਨਹੀਂ ਪਾਊਗਾ ਕਰ ਲਈ ਹੈ ਕਿਉਂਕਿ ਇਹਨੂੰ ਇਹਦੀ ਲੋੜ ਹੈ ਸਰੀਰ ਦੀ ਅੱਖ ਟੇਡਾ ਬਹਿ ਡਾਲੀ ਇਸ ਅੱਖ ਦੀ ਡਾਲੀ 'ਤੇ ਬਹਿ ਕੇ ਅੱਖ ਖਾਂਦਾ ਐਵੇਂ ਮਾਇਆ ਦੀ ਡਾਲੀ 'ਤੇ ਬਹਿ ਕੇ ਇਹ ਮਾਇਆ ਖਾਂਦਾ ਬਹਿ ਡਾਲੀ ਅੱਖ ਖਾਏ ਕਾਜ ਨਹੀਂ ਪਾਵੇ ਤਾਂ ਹੀ ਚੰਗਾ ਤਾਂ ਹੀ ਤਾਂ ਹਸੂਨ ਪਾਊਗਾ ਤਾਂ ਹੀ ਇਹਦੇ ਵਾਸਤੇ ਚੰਗੀ ਗੱਲ ਹੈ ਜੇ ਖੁਦਾਏ ਖੁਦਾਏ ਅਖ ਤੇ ਡਾਕ ਖਾਈਆ ਵੇਡ ਵਾਲੀ ਤੇ ਬੈਠਾ ਕੋਈ ਹੰਦ ਦੀ ਪਰ ਖੁਦਾਏ ਖੁਦਾਏ ਕਰੇ ਮਾਇਆ ਤੇ ਪਦਾਰਥ ਖਾਵੇ ਕੋਈ ਗੱਲ ਨਹੀਂ ਜਿਸਥਾਨ ਮਾਇਆ ਦੀ ਕਮਾਈ ਕਰੇ ਕੋਈ ਗੱਲ ਨਹੀਂ ਪਰ ਖੁਦਾਏ ਖੁਦਾਏ ਕਰੇ ਫਿਰ ਉਹਦਾ ਖੁਦਾਏ ਖੁਦਾਏ ਕਰਨਾ ਪਰਮਾਨ ਫਿਰ ਉਹਦਾ ਕੋਈ ਜੋ ਕੰਮ ਕਰਨਾ ਹੈ ਸਾਤ ਸਾਤ ਸਿਮਰੋ ਗੋਬਿੰਦਾਲਾ ਉਹ ਵੀ ਕਰਦਾ ਰਹੇ ਤੇ ਮਾਇਆ ਦੇ ਪਦਾਰਥ ਜਿਹੜੇ ਸਰੀਰ ਵਾਸਤੇ ਉਹ ਵੀ ਖਾਂਦਾ ਰਹੇ ਸਰੀਰ ਦੀ ਤੰਦਰੁਸਤੀ ਨੂੰ ਬਚਾਉਣ ਵਾਸਤੇ ਸਰੀਰ ਦੀ ਖੁਰਾਕ ਵੀ ਖਾਂਦਾ ਰਹੇ ਲੋੜਨ ਦਾ ਠੀਕ ਹੈ ਜੀ ਨਾਨਕ ਦੁਨੀਆ ਚਾਰ ਦਿਹਾੜੇ ਚਾਰ ਦਿਨਾਂ ਦਾ ਮੇਲਾ ਹੈ ਦੁਨੀਆਂ ਬਹੁਤਾ ਚੱਲਣ ਵਾਲੀ ਦਾ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇਹ ਜੀਵਨ ਵਧਾਇਆ ਜਾ ਸਕਦਾ ਸਾਹ ਜਿਹੜਾ ਖਿੱਚਦੇ ਨੇ ਆ ਦਵਾਈਆਂ ਬਣਾਉਂਦੇ ਨੇ ਆਯੁਰਵੈਦ ਆ ਜਿਹੜੇ ਨੇ ਪਹਿਲਾਂ ਜਿੱਤ ਹੋ ਗਏ ਪਹਿਲਾਂ ਉਹਦੀ ਇੰਨੇ ਜਨਮ ਦੀ ਈਯੂ ਹੋ ਗਈ ਐ ਨੇ ਜੁਗ ਦੀ ਆਈ ਉਹ ਸਭ ਗੱਲਾਂ ਨੇ ਜਿੰਨੇ ਸਾਹ ਘਣੇ ਆਏ ਨੇ ਉਨਾਂ ਹੀ ਰਹਿਣਾ ਇਹ ਵਧਾਇਆ ਘਟਾਇਆ ਨਹੀਂ ਜਾ ਸਕਦਾ ਸੁੱਖ ਕੀਤੇ ਦੁੱਖ ਹੋਈ ਜਿੰਨੇ ਅਸੀਂ ਸੁੱਖ ਪੈਦਾ ਕਰਾਂਗੇ ਉਨਾਂ ਹੀ ਦੁੱਖ ਸਾਡੂ ਮਿਲਣਗੇ ਸਾਡੇ ਕੀਤੇ ਸੁਖ ਫਾਇਦਾ ਨਹੀਂ ਹੋ ਸਕਦੇ ਅਸੀਂ ਦੁਖੀ ਹੋ ਕੇ ਸੁਖ ਫਾਇਦਾ ਕਰਦੇ ਆ ਉਹ ਜੋ ਕਿਤੇ ਪੈਦਾ ਹੋਏ ਦੁਖੀ ਹੋ ਕੇ ਸੁਖ ਫਾਇਦਾ ਕਰਨ ਵਾਲੇ ਸੁਖ ਨਹੀਂ ਹੁੰਦੇ ਦੁਖ ਸਹਿ ਕੇ ਸੁਖ ਪੈਦਾ ਕਰਨੇ ਐਸੇ ਸੁਖ ਦੀ ਕੋਈ ਲੋੜ ਨਹੀਂ ਜਿਹੜਾ ਦੁਖ ਸਹਿ ਕੇ ਫਾਇਦਾ ਹੋਵੇ ਜਿਵੇਂ ਕਿਹੇ ਜੇ ਸੁੱਖਾਂ ਦੀ ਗੱਲ ਹੋ ਰਹੀ ਹੈ ਜਿਹੜੇ ਸੁਖ ਤੋਂ ਬਾਅਦ ਧੁਖੇ ਤੋਂ ਕੋਣ ਉਹ ਦੇਖੋ ਨਾ ਅਸੀਂ ਬਿਜਲੀ ਪੈਦਾ ਕਰ ਲਈ ਪੱਖਾ ਨਹੀਂ ਚੱਲਦੇ ਔਰ ਬਿਜਲੀ ਦੇ ਇਹਦੇ ਅਸੀਂ ਡਿਪੈਂਡੈਂਟ ਹੋ ਗਏ ਅਸੀਂ ਜਿਆਦਾ ਬਿਆਕਲ ਹੋ ਜਾਨਾ ਜੇ 2 ਘੰਟੇ ਬਿਜਲੀ ਨਾ ਹੋਵੇ ਉਹਦਾ ਦੁੱਖ ਘੜੇ ਗੱਲ ਲੈ ਅਸੀਂ ਅਸੀਂ ਤਾਂ ਉਹਦੇ ਇਨਾਂ ਗੁਲਾਮ ਹੋ ਹੈ ਦੀ ਸੀ ਉਦੋਂ ਨਹੀਂ ਸੀ ਇੰਨਾ ਦੁੱਖ ਜਨਾ ਨਹੀਂ ਦੁੱਖ ਹੋ ਗਿਆ ਦੁੱਖ ਪੈਦਾ ਕਰ ਲਿਆ ਉਸੋ ਘੇਰੀ ਪੈਦਾ ਕੀਤਾ ਗੱਲਾਂ ਵਾਲੇ ਹਨ ਗੱਲਾਂ ਵਾਲੇ ਬਥੇਰੇ ਨੇ ਸਰਦ ਦੇ ਵਿੱਚ ਕੱਲ ਵਾਲੇ ਆਇਆ ਦਾ ਬੋਲ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਲੋਭ ਨਹੀਂ ਕਰਨਾ ਚਾਹੀਦਾ ਪਰ ਛੱਡ ਕੁਝ ਵੀ ਨਹੀਂ ਸਕਦਾ ਕੋਈ ਗੁਰਬਾਣੀ ਮੰਨਣ ਦੀ ਉਹਦੀ ਗੱਲਾਂ ਵਹਿਰੀਆਂ ਕਰਦੇ ਲੋਕਾਂ ਵਾਸਤੇ ਗੱਲਾਂ ਕਰਦੇ ਨੇ ਆਪ ਕੋਈ ਨਹੀਂ ਛੱਡ ਸਕਦਾ ਹਾਂਜੀ ਮੱਖੀ ਮਿੱਠੇ ਮਰਨਾ ਜਿਨੇ ਤੂੰ ਰੱਖੈਂ ਤਿੰਨ ਨੇੜ ਨਾ ਤਿੰਨ ਭੌਸਾਗਰ ਤਰਨਾ ਮੱਖੀ ਜਿਹੜੀ ਹੈ ਮੱਛੇ ਤੇ ਜਾਨ ਦੇ ਦਿੰਦੀ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਜੀਵਨ ਮਿੱਠੇ ਨਾਲ ਖਤਮ ਹੋ ਜਾਣਾ ਹੈ ਮਿੱਠਾ ਨਹੀਂ ਛੱਡਦੀ ਮਰ ਜਾਂਦੀ ਹੈ ਸੀਰੇ ਤੇ ਮੱਖੀ ਬਹਿ ਜਾਂਦੀ ਹੈ ਕਹਿੰਦੇ ਨੇ ਸਾਦੀ ਰਹਿੰਦੀ ਹੈ ਸੀਰੇ ਦੇ ਬੱਚੇ ਉਹਦੇ ਨਾਲ ਜਿਹੜੀਆਂ ਨੇ ਪੈਰ ਚਿਪਕ ਜਾਂਦੇ ਨੇ ਸੀੜਾ ਫੜ ਲੈਂਦਾ ਉਹ ਨੂੰ ਛੱਡਦਾ ਦੀ ਉੱਥੇ ਮੌਤ ਹੋ ਜਾਂਦੀ ਹੈ ਉਹ ਖਾਈ ਜਾਂਦੀ ਹੈ ਉਹਨੂੰ ਪਤਾ ਨਹੀਂ ਵੀ ਮੈਂ ਹੁਣ ਉਹ ਨਾਲ ਨਹੀਂ ਸਕਦੀ ਇਹ ਮੈਂ ਜਿਹੜਾ ਮੋਹ ਹੈ ਸੰਸਾਰ ਦੇ ਵਿੱਚ ਮੋਹ ਮਿੱਠਾ ਦੋ ਪ੍ਰਕਾਰ ਦੀ ਮੱਖੀ ਹੈ ਇੱਕ ਮੱਖੀ ਫੁੱਲਾਂ ਦੇ ਜੋ ਮਿੱਠਾ ਸ਼ਹਿਦ ਕੱਢਦੀ ਹੈ ਫੁੱਲਾਂ ਦੀਆਂ ਨੂੰ ਫੜ ਮਿੱਠਾ ਸ਼ਹਿਦ ਇਕੱਠਾ ਕਰਦਾ ਦੀਆਂ ਉਹ ਜਾ ਕੇ ਇਹ ਮੱਖੀ ਮਿੱਠੇ ਦੇ ਬੰਦੀਆਂ ਖਾਂਦੀ ਰਹਿੰਦੀ ਹੈ ਇਕੱਠਾ ਦੀ ਕਰਦੀ ਲੈ ਕੇ ਨਹੀਂ ਦੇ ਦੇ ਜਾਂਦੀ ਜਿਹੜੀ ਗੁਰਮੁਖੀ ਮੱਖੀ ਆ ਨੋਪ ਦਾ ਮਿੱਠਾ ਇਕੱਠਾ ਕਰਦੀ ਹੈ ਦੋਈ ਮੱਖੀ ਮਿੱਠਾ ਉੱਥੇ ਹੀ ਜਾਂਦਾ ਮੱਖੀ ਵੀ ਉੱਥੇ ਰਹਿੰਦੀ ਹੈ ਤਨ ਧਰਤੀ ਤਨ ਭਸਮ ਦੀ ਢੇਰੀ ਭਸਮ ਦੀ ਢੇਰੀ ਸਰੀਰ ਭਸਮ ਦੀ ਢੇਰੀ ਬਣ ਜਾਂਦਾ ਜਿਹਦੇ ਖਾਤਰ ਮੱਖੀ ਮਿੱਠਾ ਖਰਦੀ ਹੈ ਜੇ ਕਬੂਤੀ ਰਹਿ ਜਾਂਦਾ ਜਿਹੜੇ ਗਰੂਖ ਨੇ ਉਹ ਮਿੱਠਾ ਘਰ ਦੇ ਦੇ ਉਹ ਉਸ ਮੱਖੀ ਦੀ ਨਿਆਈਂ ਦੇ ਜਿਹੜੀ ਮੱਖੀ ਮਿੱਠੇ ਤੇ ਪ੍ਰਾਣ ਦੇ ਦਿੰਦੀ ਹੈ ਹਰ ਕੁਝ ਵੀ ਉਹਦੇ ਹੱਥ ਦੀ ਉਹਦਾ ਸਰੀਰ ਵੀ ਉੱਥੇ ਰਹਿ ਜਾਂਦਾ ਉਹ ਠੀਕ ਹੈ ਜੀ ਮੱਖੀ ਮਿੱਠੇ ਮਰਨਾ ਜਿੰਨ ਤੂੰ ਰੱਖੇ ਤਿੰਨ ਨੇੜ ਆਵੇ ਤਿੰਨ ਭੌ ਸਾਗਰ ਤਰਨਾ ਜੇ ਮੂਲ ਨਾਲ ਪ੍ਰੇਮ ਹੋਵੇ ਉਹ ਸੰਸਾਰ ਜਿਹੜਾ ਰਹਿਦਾ ਹੋਇਆ ਉਹ ਮੂਲ ਦੀ ਖਰਾਕ ਪੈਦਾ ਕਰਦਾ ਫਿਰ ਨਾ ਉਹ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਪੈਦਾ ਕਰਦਾ ਉਹਦੇ ਬਹੁਤ ਹੀ ਨੇੜੇ ਹੁੰਦਾ ਭੋਸਾ ਕਰਦਾ ਨਾ ਉਹ ਪੈਸਾ ਕਰ ਦਰ ਜਾਂਦਾ ਕਾਰ ਸਾਈਕਲ ਨੂੰ ਪਾਰ ਹੋ ਜਾਂਦਾ ਹੁਣ ਜੀ ਅਗਮ ਅਗੋਚਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇ ਬਣਹਾਰ ਤੂੰ ਅਗਮ ਹੈ ਅਗੋਚਰ ਹੈ ਜਿੱਥੇ ਅਸੀਂ ਆ ਲੈ ਕੇ ਵੀ ਪਹੁੰਚ ਸਕਦੇ ਉਹਨੂੰ ਅਗਮ ਕਹਿੰਦੇ ਆ ਬੁੱਧੀ ਦੀ ਪਹੁੰਚ ਤੋਂ ਵੀ ਪਰੇ ਅਗੋਚਰਾਂ ਦੇ ਸਦ ਨਹੀਂ ਤੂ ਹੈਗਾ ਇਹ ਤੇ ਤੇਰਾ ਕੋਈ ਕੰਮ ਨਹੀਂ ਹੈ ਅਗੋਚਰ ਵੀ ਜਿਹੜੀਆਂ ਗਿਆਨ ਇੰਦਰੀ ਇਹਨਾਂ ਦੀ ਪਕੜ ਚ ਨਹੀਂ ਹੈ ਕਰਮ ਜਿਹਦੇ ਗੋਚਰੇ ਨਹੀਂ ਕਿਸੇ ਦੇ ਆਪਣਾ ਕਹਿਣ ਮੈਨੂੰ ਤੇਰੇ ਗੋਚਰੇ ਕੰਮ ਤੇਰੇ ਥਾਂ ਕੋਈ ਕੰਮ ਉਹ ਤੇਰਾ ਲਫ਼ਜ਼ਾ ਬਰਤਦੇ ਆ ਪੰਜਾਬੀ ਚ ਅਗਾਮਾ ਮਨ ਬੁੱਧੀ ਤੋਂ ਪਰੇ ਤੂੰ ਹੈਗਾ ਜਿਵੇਂ ਅਸੀਂ ਕੁਦਰਤ ਦੇ ਗੋਚ ਰਹੇ ਆ ਸਾਰੇ ਜੀਵ ਜਿਹੜੇ ਹਨ ਗੋਚ ਰਹੇ ਆ ਕਿੱਥੇ ਤੇ ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਤੋਂ ਪੂਰੀਆਂ ਹੁੰਦੀਆਂ ਨੇ ਅਸੀਂ ਆਪਣੀਆਂ ਲੋੜਾਂ ਆਪ ਨੀ ਪੂਰੀਆਂ ਕਰ ਸਕਦੇ ਸਰੀਰ ਕਰਕੇ ਮਨ ਕਰਕੇ ਜੀ ਤੂੰ ਧਣੀ ਸੱਚਾ ਅਲੱਖਪਰ ਤੂੰ ਧਣੀ ਸੱਚਾ ਹੈ ਤੂੰ ਅਲੱਖਾਂ ਅਪਾਰ ਅਲੱਖਾਂ ਗਿਆਨ ਦੀਆਂ ਤੇ ਪਰਿਆ ਦੇਖਿਆ ਨਹੀਂ ਜਾ ਸਕਦਾ ਅਪਾਰ ਤੇਰਾ ਪਰਲਾ ਪਾਸਾ ਹੈ ਜੀ ਫਿਰ ਲੈਸਨ ਤੋਂ ਬਾਉਂਡਰੀ ਦੀ ਹੈ ਮਾਇਆ ਬਾਉਂਡਰੀ ਦੇ ਵਿੱਚ ਬੰਦ ਹੈ ਮਾਇਆ ਲਿਮਟਿਡ ਹੈ ਤੂੰ ਲਿਮਟਿਡ ਸੋ ਦਾਤਾ ਸਭ ਮੰਗਤੇ ਇੱਕੋ ਦੇ ਬਣਹਾਰ ਤੂੰ ਲਿਆ ਕੇ ਨਹੀਂ ਦਿੰਦਾ ਤੂੰ ਦਾਤਾ ਜਿਹੜਾ ਕਿਧੋਂ ਲਿਆ ਕੇ ਦੱਸ ਦਵੇ ਦਾਤਾ ਨਹੀਂ ਦਿੰਦਾ ਸੰਸਾਰ ਦੇ ਰਾਹ ਜੇ ਦਾਤ ਕਰਦੇ ਵੀ ਨੇ ਤਾਂ ਕਿਧੋਂ ਲਿਆ ਕੇ ਕਰਦੇ ਨੇ ਮੁੱਕੇ ਕਰਦੇ ਤੂੰ ਦਾਤਾ ਸਭ ਮੁੱਕਤੇ ਇੱਕੋ ਦੇ ਬਣਹਾਰ ਦੇਣਹਾਰ ਤੂੰ ਇੱਕੋ ਜਿੰਨੀ ਸੇ ਵਿਆਹ ਤਨੀ ਗੁਰਮਤੀ ਵਿਚਾਰ ਇਕਨਾ ਨੂੰ ਤੁਦ ਐਵੇਂ ਭਾਮਦਾ ਮਾਇਆ ਨਾਲ ਪਿਆਰ ਜੇ ਵਾਕੀ ਜੇ ਜਿਹੜੇ ਤੇਰੇ ਭਾਨੇ ਚੱਲੇ ਨੇ ਭਾਨਾ ਕੁਛ ਕਰਦਾ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਭਾਨੇ ਨਾਲ ਹੋ ਰਿਹਾ ਜਿਵੇਂ ਤੂੰ ਚਲਾਉਂਦਾ ਉਹਵੇਂ ਚੱਲਦਾ ਉਹ ਤੇਰੀ ਸੇਵਾ ਕਰਦਾ ਗੁਰਮਤੀ ਵਿਚਾਰ ਗੁਰਮਤਿ ਨੂੰ ਵਿਚਾਰ ਕੇ ਜਿਹਨਾਂ ਨੇ ਤੇਰੀ ਸੇਵਾ ਕੀਤੀ ਹੈ ਸੇਵਾ ਅਸੀਂ ਆਪਣੀ ਮਰਜ਼ੀ ਨਾਲ ਵੀ ਕਰਦੇ ਹਾਂ ਨੂੰ ਆਪਣੀ ਮਰਜ਼ੀ ਨਾਲ ਸੇਵਾ ਬਹੁਤੀ ਕਰਦੇ ਹਾਂ ਉਦੇ ਭਾਂਣ ਚ ਰਹਿ ਕੇ ਸੇਵਾ ਘਟ ਹੁੰਦੀ ਹੈ ਜਿਹੜੇ ਉਹਦੇ ਭਾਂਣ ਚ ਰਹਿ ਚਲਦੇ ਨੇ ਉਹ ਸੇਵਾ ਕਰਨੀ ਚਾਹੁੰਦੀ ਜਿਵੇਂ ਤੈਨੂੰ ਸੁਫਾਇਆ ਉਹੀ ਸੁਖੀ ਰਹਿੰਦੇ ਤੇ ਗੁਰਮੱਦੀ ਵਿਚਾਰ ਕਰਦੇ ਰਹਿੰਦੇ ਨੇ ਇਕਰਾਂ ਨੂੰ ਤੂੰ ਇਹ ਮਹਿਬੂਬ ਇਕਰਾਂ ਨੂੰ ਤੈਨੂੰ ਕੋਈ ਤੈਨੂੰ ਇਸ ਨਜ਼ਰੀਏ ਨਾਲ ਦੇਖਦੇ ਨੇ ਮਾਇਆ ਨਾਲ ਪਿਆਰ ਉਹਨਾਂ ਦਾ ਮਾਇਆ ਨਾਲ ਪਿਆਰ ਜਿਵੇਂ ਛਿਬਲੀ ਵਾਸਤੇ ਗੋਲਿਆ ਹਾਇਤਾ ਉਹ ਦਿੰਦਾ ਹੈ ਦਿੰਦਾ ਉਹ ਦਿੰਦਾ ਉਹ ਦਿੰਦਾ ਉਹ ਏਦਾਂ ਨੂੰ ਦੇ ਦੇ ਦਿੱਤੇ ਤੋ ਆ ਕੇ ਜੋ ਨੇ ਆਪਣੀ ਵਸਟਾ ਜਿਹਨੇ ਦੋਲੇ ਦੇ ਨੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਤੂੰ ਦੱਨਾ ਪਹਾੜੇ ਚ ਨਹੀਂ ਚੱਲਦੇ ਤੇਰੇ ਆਪਣੇ ਪਹਾੜੇ ਕੋ ਤਾਕ ਕੋ ਤੇ ਤੁਬ ਗਦੇ ਨੇ ਉਹਨਾਂ ਨੂੰ ਇਹ ਵੀ ਲੱਗਦਾ ਜਿਉ ਤੋਬ ਜਾਇਜ ਹੈ ਹੋਜੀ ਗੁਰਕੇ ਸ਼ਬਦ ਸਲਾਹੀ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤੀ ਨਾ ਹੋਈ ਮਿਣ ਸਤਗੁਰ ਨਾਲ ਪਿਆਰ ਗੁਰਬਾਨੀ ਦਾ ਉਪਦੇਸ਼ ਲੈ ਕੇ ਫਿਰ ਉਹਦੀ ਸਿੱਖਿਆ ਕਾਸੀ ਚਾਹੀਦੀ ਗੁਰਬਾਣੀ ਦੇ ਉਪਦੇਸ਼ ਤੋਂ ਸਖਣੇ ਲੋਕ ਤਾਂ ਆਦਮੀ ਦੀ ਸਫਸਲਾ ਕਰਨਾ ਅਗੇ ਉਹਦੇ ਤੱਕ ਪਹੁੰਚਿਆ ਹੀ ਨਹੀਂ ਜਿਹੜੇ ਰਾਹ ਵਾਲੇ ਦੱਸਣ ਵਾਲੇ ਰਾਹ ਦੱਸਣ ਵਾਲੇ ਨੇ ਉਹਨਾਂ ਦੀ ਸਫਸਲਾ ਕਰਨੀ ਵਾਹ ਪੁਰਸ਼ ਬਣਾ ਕੇ ਉਹਨਾਂ ਨਾਲ ਜੁੜ ਗਏ ਵਾਹ ਪਰਸ਼ਾਨੀ ਉਹ ਪੂਜਾ ਕਰਨ ਲੱਗੇ ਤਾਂ ਆਈਏ ਅੰਤਰ ਪ੍ਰੇਮ ਪਿਆਰ ਜਿਨ੍ਹਾਂ ਦੇ ਅੰਦਰ ਪ੍ਰੇਮ ਔਰ ਪਿਆਰ ਹੁੰਦਾ ਦੋ ਚੀਜ਼ਾਂ ਆ ਇਕੱਠੀਆਂ ਪ੍ਰੇਮ ਪਿਆਰ ਹੋਰ ਚੀਜ਼ਾਂ ਤਾਂ ਅੱਲਾ ਪਿਆਰ ਹੋਰ ਚੀਜ਼ ਪ੍ਰੇਮ ਪਿਆਰ ਹੁੰਦਾ ਜੋਤ ਨਾਲ ਪਿਆਰ ਸੱਲਾ ਪਿਆਰ ਹੁੰਦਾ ਹੈ ਉਹ ਹੁੰਦਾ ਹੈ ਉਹਦੀ ਕਾਇਨਾਤ ਨਾਲ ਪਿਆਰ ਕਰਨਾ ਉਹਦੇ ਜੀਵਾਂ ਨਾਲ ਜਿਹੜੇ ਸਾਨੂੰ ਬਾਹਰ ਦੇ ਨਾਲ ਪ੍ਰੇਮ ਕਰਨਾ ਬਾਹਰ ਦੇ ਨਾਲ ਵੀ ਪ੍ਰੇਮ ਕਰਨਾ ਦੋਹਾਂ ਨਾਲ ਕਰਦੋ ਸਾਰਿਆਂ ਨੂੰ ਇੱਕ ਪਤਾ ਇੱਕ ਅਸਕੇ ਹਮ ਕੇ ਪਿਆਰ ਹੈ ਉਹ ਪ੍ਰੇਮ ਪਿਆਰ ਹੈ ਸੱਚਨਾ ਵੀ ਪਿਆਰ ਹੈ ਜਿਹੜੇ ਝੂਠ ਵਿੱਚ ਗ੍ਰਸਤ ਨੇ ਉਹਨਾਂ ਨਾਲ ਵੀ ਪਿਆਰ ਹੈ ਉਹਨਾਂ ਨਾਲ ਜਗਤ ਚੱਲਣ ਦਾ ਰੱਖ ਲੈ ਆਪਣੀ ਚਰਪਾਹ ਤਾਰ ਉਹਨਾਂ ਨਾਲ ਵੀ ਪਿਆਰ ਹੈ ਚਾਹੇ ਉਹ ਬੁਰੇ ਨੇ ਤਾਂ ਵੀ ਉਹਨਾਂ ਨਾਲ ਪਿਆਰ ਹੈ ਸਰ ਜੀ ਵਿਣ ਪ੍ਰੀਤੀ ਭਗਤੀ ਨਾ ਹੋਵੇਈ ਵਿਣ ਸਤਗੁਰ ਨਾਲ ਲੱਗੇ ਪਿਆਰ ਇਹ ਜੇ ਪ੍ਰੀਤੀ ਹੈ ਦੀ ਨਾ ਸਾਰਿਆਂ ਨਾਲ ਤੁਹਾਡੀ ਉਹਦੇ ਬੰਦਿਆਂ ਨਾਲ ਜੇ ਪ੍ਰੀਤੀ ਹੈ ਦੀ ਫਿਰ ਉਹਦੀ ਭਗਤੀ ਨਹੀਂ ਹੋ ਸਕਦੀ ਜੇ ਉਹਦੀ ਉਦਾਸ ਨਾਲ ਪ੍ਰੀਤੀ ਦੀ ਹੈ ਤੁਹਾਡੀ ਤਾਂ ਉਹਦੀ ਭਗਤੀ ਕਿਵੇਂ ਹੋ ਜੂ ਉਹ ਸਾਰਿਆਂ ਨੂੰ ਦੇ ਹੀ ਜਾਂਦਾ ਆਜ਼ਾਦ ਕੋ ਦੇ ਤੇ ਆਜ਼ਾਦ ਕੋ ਦੇ ਤਜ਼ਵੀਦ ਕੋ ਦੇ ਤਜ਼ਮੂਲ ਕੋ ਦੇ ਹੈ ਉਹ ਸਾਰਿਆਂ ਨੂੰ ਦੇ ਹੀ ਜਾਂਦਾ ਉਹ ਵਿਤਕਰਾ ਆਦੀ ਕਰਦਾ ਅਸੀਂ ਚਾਹੇ ਵਿਤਕਰਾ ਕਰੀਏ ਅਸੀਂ ਕਦੂਏ ਨਾਲ ਜਿਹੜਾ ਵਿਤਕਰਾ ਕਰਦੇ ਆ ਇਹ ਅਗਿਆਨਤਾ ਹੈ ਵਿਤਕਰਾ ਕਰਨ ਨਾਲੇ ਦੀ ਭਗਤੀ ਨਹੀਂ ਹੋ ਸਕਦੀ ਜਿਹੜੇ ਕਹਿੰਦੇ ਅਸੀਂ ਸਿੱਖਾਂ ਇਹ ਬਸਮਾਨ ਨੇ ਇਸ ਦੂਰ ਉਪਰਸੀ ਨਹੀਂ ਕਰ ਸਕਦੇ ਗੁਰਬਾਨੀ ਨਹੀਂ ਮੰਨ ਸਕਦੇ ਕਦੇ ਵੀ ਉਹ ਗੁਰਬਾਨੀ ਤੋਂ ਬਹੁਤ ਦੂਰ ਚਲੇ ਜਾਂਦੇ ਹੋ ਪ੍ਰੀਤ ਬਿਨਾਂ ਭਗਤੀ ਦੀ ਸਾਰਿਆਂ ਨਾਲੇ ਪ੍ਰੀਤ ਕਰਨੀ ਚਾਹੀਦੀ ਬੁਰੇ ਦਾ ਭਲਾ ਕਰ bure da bure da phala kar bure na koi nahi je bure ne taan hi oh to dur reh taan hi dukhi ne jehra bura nahi hai oh dukhi nahi hunda jehra bhagta hai dukh nu daru mundda dukhi nahi hai oh dukh nu dukh naal dukhi hoyi nahi sakda dukh nu daru mundan wala ho ji vin satgurd na lagge pyar satgurd de sach de gyan mera pyar nahi lagda koi satgurd jina ch samjha na deve satgurd di gal ਅਜਿ ਨੂੰ ਜਾਣ ਕੇ ਹੀ ਸਭ ਨਾਲ ਪਿਆਰ ਹੋ ਸਕਦਾ ਹੁਜੀ ਤੂੰ ਪ੍ਰਭ ਸਭ ਤੁਝ ਸੇਵਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖੀਆ ਸੱਚਾ ਨਾਮ ਮਿਲੇ ਆਧਾਰ ਤੂੰ ਪ੍ਰਭ ਤੂੰ ਤਾਂ ਪ੍ਰਭ ਸਭ ਤੋਂ ਸੇਵ ਦੇ ਸਾਰੇ ਤੇਰੀ ਸੇਵਾ ਕਰਦੇ ਨੇ ਅਸਲ ਇਕ ਢਾਡੀ ਰਾਗੀ ਦੀ ਗੱਲ ਦੇ ਬਹੁਤ ਇੰਪੋਰਟੈਂਟ ਨੁਕਤਾ ਕੋਈ ਬਾਣੀ ਜੇ ਰਾਗੀ ਵਾਸਤੇ ਕੋਈ ਜਗალი ਢਾਡੀ ਵਾਸਤੇ ਜਰਾ ਔਰ ਢੱਡ ਗੁਰੂ ਦਾਦੇ ਕੋਲ ਹੈ ਜੀ ਕਿਸੇ ਗੁਰੂ ਕੋਲ ਹੈ ਨਹੀਂ ਗੁਰੂ ਘਰ ਚ ਕਹਿੰਦੇ ਨੇ ਢਾਡੀ ਢਾਡੀ ਜਿਹੜਾ ਹੈ ਜਦ ਹੋ ਕੇ ਗਾਉਂਦਾ ਉੱਚੀ ਆਵਾਜ਼ ਦੇ ਵਿੱਚ ਬਾੜਾ ਨਾ ਹੈ ਔਰ ਢਾਡੀ ਹੀ ਹੋ ਦਿੰਦਾ ਦਾਦੀ ਕਿੱਥੇ ਆਇਆ ਸਾਡੀ ਆਇਆ ਹੈ ਦਾਦੀ ਕਰੇ ਪੁਕਾਰ ਸਾਡੀ ਸਾਡੀ ਸੁਰਾਂ ਨਿਕਾਲ ਲੈਂਦਾ ਆ ਲੈਂਦਾ ਉਸ ਕਰੇ ਪੁਕਾਰ ਦਾਦੀ ਵੀ ਤੱਕ ਤੇਰੇ ਕੋਲ ਦਾਤਾ ਸਾਰੇ ਤੈਨੂੰ ਤੇਰਦੇ ਨੇ ਮੈਂ ਉੱਚੀ ਆਵਾਜ਼ ਦੇ ਵਿੱਚ ਤੇਰੀ ਤੇਵਾ ਦਾ ਪੁਕਾਰ ਪੁਕਾਰ ਕੇ ਲੋਕਾਂ ਨੂੰ ਦੱਸ ਦਵਾਂ ਭਈ ਭਾਈ ਉਸ ਦੀ ਸੇਵਾ ਕਰੋ ਜਿਹੜਾ ਸਾਰੇ ਜੀ ਜੰਤ ਦਾ ਠਾਕੁਰ ਹੈ ਜਿਹਨੂੰ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੇ ਜੀ ਜਮ ਜਿਨੇ ਮਾਇਆ ਨਹੀਂ ਰਹੀ ਸਾਰਿਆਂ ਨੂੰ ਰੋਜ਼ੀ ਦੁੱਧਾ ਰੋਟੀ ਦਿੰਦਾ। ਉਹਦੀ ਕਰੋ। ਹਾਂ ਜੀ। ਦੇਹਦਾਨ ਸੰਤੋਖਿਆ ਸੱਚਾ ਨਾਮ ਮਿਲੇ ਆਧਾਰ। ਉਹ ਸੰਤੋਖੀ ਆਪ ਹੈ ਪਹਿਲਾਂ ਤਾਂ। ਸੰਤੋਖ ਤਾਂ ਹਰ ਗੱਲ ਨਾਲ ਉਹਦੇ ਵਰਗਾ ਬਣਨਾ। ਮਾਇਆ ਸਾਰੀ ਉਹਦੀ ਹੈ ਮਾਇਆ ਨਾਲ ਪ੍ਰੇਮ ਕਰਦਾ ਉਹ ਪ੍ਰੇਮ ਨਹੀਂ ਕਰਦਾ ਮਾਇਆ ਦੀ ਇੱਛਾ ਨਹੀਂ ਉਹਦੇ ਅੰਦਰ। ਸਾਡੇ ਵਾਸਤੇ ਮਾਇਆ ਉਹਦੀ ਕੋਈ ਅੱਛਾ ਨਹੀਂ ਮਾਇਆ ਵਾਸਤੇ। ਜਿਹਦੇ ਅੰਦਰ ਮਾਇਆ ਦੀ ਇੱਛਾ ਨਹੀਂ ਭੁੱਖ ਨਹੀਂ ਉਹ ਸੰਤੋਖੀ ਹੈ। ਇਹ ਸੰਤੋਖਿਆ ਤੂੰ ਦਾਨ ਦੇ ਬੰਦੂ। ਕੀ ਦੇ ਸੱਚਾ ਨਾਮ ਮਿਲੇ ਉਹਦਾ ਤੂੰ ਸੱਚ ਦਾ ਨਾਮ ਜਿਹੜਾ ਉਹ ਆਦਾਰ ਮਿਲੇ ਮਾਇਆ ਦਾ ਆਦਾਰ ਕੋਈ ਨਹੀਂ ਚਾਹੁੰਦਾ ਮਾਇਆ ਦਾ ਆਦਾਰ ਜਿਹੜਾ ਹੈਗਾ ਉਹ ਛੱਡ ਦਿੱਤਾ ਮੈਂ ਤੂੰ ਆਪਣੇ ਨਾਮ ਦਾ ਆਦਾਰ ਦੇ ਹਾਂਜੀ ਠੀਕ ਹੈ ਜੀ ਇੱਥੇ ਜਿਹੜਾ ਤੂੰ ਪ੍ਰਭ ਆ ਰਿਹਾ ਇਹ ਇੱਥੇ ਫਿਰ ਹੁਣ ਪਰਮੇਸ਼ਰ ਵਾਸਤੇ ਆ ਰਿਹਾ ਹਾਂ ਪਰਮੇਸ਼ਰ ਵਾਸਤੇ ਆਇਆ ਹੁਣ ਬੋਲਦਾ ਰਿਹਾ ਨੂੰ ਹੋ ਇਹ ਪੰਕਤੀਆਂ ਬੋਲੀਆਂ ਹੋਈਆਂ ਦੀਆਂ ਠੀਕ ਹੁਣ ਇਕ ਹੋਇਆ ਬੋਲ ਰਿਹਾ ਤੇ ਉਹਦਾ ਪ੍ਰਭ ਪਰਮੇਸ਼ਰ ਹੀ ਹੈ ਉਹਦਾ ਤਾਂ ਪ੍ਰਭ ਫਿਰ ਗਾਣ ਰਹੀ ਹੋਊ ਠੀਕ ਹੈ ਜੀ ਇੱਥੇ 19ਵੀਂ ਪੌੜੀ ਦੀ ਸਮਾਪਤੀ ਹੈ ਜੀ